ਪਰਮੇਸ਼ਰ ਦੀਆਂ ਦਾਤਾਂ ਨੇ ਉਹ ਆਬੇਦੰਦ ਹੈ ਇਹ ਤੈਨੂੰ ਬੋਧਰ ਕਰਨ ਦੀ ਲੋੜ ਨਹੀਂ ਹੈ ਤੈਨੂੰ ਆਪਣਾ ਯਤਨ ਜਿਹੜੇ ਨਾਲ ਦੀ ਲੋੜ ਨਹੀਂ ਜਿਹੜੀ ਦਾਤ ਮਿਲਦੀ ਹੈ ਸਭ ਇੱਕ ਯੱਗ ਪਬਲਿਕ ਹੈ ਠੀਕ ਹੈ ਯੱਗ ਦਾ ਪ੍ਰਬੰਧ ਕੀਤਾ ਕਿਸੇ ਸਾਧ ਸੰਤ ਨੇ ਕੀਤਾ ਕਿਸੇ ਨੇ ਕੀਤਾ ਇੱਕ ਬੰਦੇ ਨੇ ਕੀਤਾ ਕਿਸੇ ਸੰਤਾ ਨੇ ਪਬਲਿਕ ਨੇ ਖਾੜਿਆ ਨੇ ਇਹ ਤਾਂ ਖਾਣ ਜਾਂਦਾ ਤੁਹਾਨੂੰ ਕੀ ਜੋ ਦੇਣਗੇ ਖਾਣ ਲੈ ਕੀ ਤਾਂ ਉਹਦੇ ਮੰਗਣ ਦੀ ਗੱਲ ਹੈ ਉਹਨਾਂ ਨੇ ਨਹੀਂ ਸਲਾਹ ਦਿੱਤਾ ਤੁਸੀਂ ਕਹੋ ਤੁਹਾਨੂੰ ਸਲਾਹ ਚਾਹੀਦਾ ਬਿਲਕੁਲ ਗਲਤ ਉਹਨਾਂ ਨੇ ਯੱਕ ਕੀਤਾ ਜੋ ਦੇਰ ਜੋ ਦੇ ਬੇਦਗਾਇਆ ਸੇ ਵੀ ਹੋਈ ਸਾਧਗੁਰਦੀ ਹੋਈ ਹੈ ਐ ਸੈਂਸ ਵਿੱਚ ਕਹੀ ਹੋਈ ਗੱਲ ਹੈ ਪਰ ਦਾਤ ਆ ਪਰ ਮੰਗਣੀ ਨਹੀਂ ਇਹ ਦਾਤ ਆਪਾਂ ਦੇ ਸਵਾਲ ਤਾਂ ਇਹ ਦਾਤ ਮੰਗਣ ਵਾਲੀ चीज ਗੱਲ ਕਹਿਣੀ ਸੀ ਉਹਨੇ ਮੰਗ ਲਈ ਤਾਂ ਕਮਰਾ ਨਾਲ ਖੜੀ ਹੈ ਅਸੀਂ ਕਿਵੇਂ ਮੰਗ ਸਕਦੇ ਜਿਹੜੇ ਸਾਰੇ ਬੰਦੇ ਜਿਹੜਾ ਕਿਸੇ ਦੇ ਘਰੋਂ ਆਪਣੇ ਘਰ ਵੀ ਰੋਟੀ ਖਾ ਲਿਓ ਕੋਈ ਚੀਜ਼ ਫालतू ਨਹੀਂ ਲੰਘਦੀ ਕੋਮਲਨ ਪਤਾ ਸੋਈ ਜੋ ਹੈ ਮੈਨੂੰ ਆ ਗਿਆ ਅਸੀਂ ਕਹਿੰਦੇ ਫਰਾਂ ਦੇ ਸਲਾਦ ਹੈਗਾ ਫਰਾਂ ਜਾ ਰਹੇਗਾ ਬਿਲਕੁਲ ਬੇਵਕੂਫੀ ਹੈ ਅਗਲੇ ਦਿਨਾਂ ਹੋਵੇ ਹਾਂ ਜੇ ਪੁੱਛੇ ਵੀ ਆ ਚੀਜ਼ ਹੈ ਲੈਣੀ ਹੈ ਤੁਸੀਂ ਕਹਿ ਸਕਦੇ ਇਹਨਾਂ ਸੰਤ ਸੁਭਾਅ ਵਾਲਿਆਂ ਨੂੰ ਨਹੀਂ ਕਦੇ ਬੰਦ ਕਰਦੇ ਕਦੇ ਨਹੀਂ ਬੰਦ ਕਰਦੇ ਜਦ ਦੇ ਕੱਢੀ ਫਲੂਣੇ ਗਲ ਉਹਦਾ ਘਟ ਜੋ ਕੁਝ ਬਸ ਕੋ ਕੋ ਧਿਆਨ ਖਾਣ ਚਲੇ ਗਿਆ ਫਿਰ ਰਸ ਵਾਇਆ ਦੇ ਫਿਰ ਇਹ ਇਹ ਸਵਸਥਾ ਤਾਂ ਅੱਗੇ ਜਾ ਕੇ ਕਰਨਾ ਪਹਿਲਾਂ ਤਾਂ ਵਾਇਆ ਦੀ ਅਵਸਥਾ ਇੱਥੇ ਰੱਖਤਾ ਇਹ ਤਾਂ ਗਾਹਾਂ ਜਾ ਕੇ ਧਰਮ ਦੇ ਟੈਸਟ ਦੀ ਗੱਲ ਹੈ ਇਹ ਤਾਂ ਪਹਿਲਾ ਪਹਿਲਾ ਧਰਮ ਦੇ ਟੈਸਟੇ ਲਿਆ ਜਿਹੜੀ ਗੱਲ ਤਾਂ ਇਹ ਵੀ ਧਰਮ ਕੋਲੋਂ ਧਰਮ ਕੀ ਹੈ ਧਰਮ ਧਰਮ ਅਰਥ ਕਾਉਂ ਮੋਕਸ਼ ਧਰਮ ਤਰੰਗ ਕਰ ਦੋ ਕਾਹ ਪਹਿਲੇ ਤਰੰਗ ਨਹੀਂ ਨਹੀਂ ਹੱਥ ਕੇ ਮੇਰੇ ਤਰੰਗ ਪਹਿਲਾਂ ਹੱਥ ਬਣਾ ਲਈ ਦਿਸਦਾ ਤਰੰਗ ਮਰ ਤਰਨਾ ਕਾਹ ਮੂ ਉਹ ਤੂੰ ਸਮਝੇ ਨਹੀਂ ਗੱਲ ਉਹ ਬਗਦੇ ਜਾਈ ਦੋ ਜਾ ਗਈਆਂ ਕਹਿਣ ਦਾ ਭਾਵੇਂ ਸੀਗਾ ਜਿਹੜੀ ਜਾਣਕਾਰੀ ਚਿੰਤਨ ਜਿਹੜਾ ਹੈਗਾ ਮਨੁੱਖ ਦੀ ਜਿਹੜੀ ਅਗਵਾਈ ਹੈ ਭਾਈ ਗੱਲ ਦੇਖੋ ਉਹ ਚਿੰਤਨ ਦੀ ਸਿਰਫ ਕਰਦਾ ਹੈ ਵਿਚਾਰ ਚਾਰ ਪ੍ਰਕਾਰ ਦਾ ਗਿਆਨ ਮੈਂ ਦੀ ਜਿਹੜੀ ਦੀ ਗੱਲ ਉਹ ਸਰਵੇ ਕਹਿ ਰਹੇ ਇਹ ਨਹੀਂ ਕਹਿ ਦੀ ਗੱਲ ਨਹੀਂ ਹੈ ਜਿਸ ਵਕਤ ਤ੍ਰਿਸ਼ਨਾ ਲੱਗੀ ਸੀ ਉਹਦਾ ਜਾਣਨ ਕੀ ਸੀ ਜਾਣਨ ਪਿਆਸ ਰੱਖਦੀ ਹੈ ਜਾਣਨ ਕੀ ਹੈ ਪਿਆਸ ਨੂੰ ਲੱਦੀ ਪਾਣੀ ਪੋਖਲ ਦੀ ਤੇ ਖਾਂਦਾ ਬੱਚੇ ਪੈਦਾ ਹੁੰਦੇ ਨੇ ਖਾਂਦੇ ਨੇ ਗੱਲ ਉਹਨੂੰ ਕਿੱਥੋਂ ਆਇਆ ਇਹਦਾ ਬੀਜ ਮੰਤਰ ਸਰਬ ਕੋ ਗਿਆਨ ਜੋ ਬੀਜ ਮੰਤਰ ਸਰਬ ਕੋ ਗਿਆ ਨਾ ਜਾਣਨ ਦਾ ਤੇ ਪਰੇ ਹੈ ਉਹ ਗੱਲ ਉਹ ਬਤਵਾਰ ਨੇ ਮੈਨੂੰ ਪਤਾ ਜਿਹੜੀ ਗੱਲ ਉਹਨਾਂ ਨੇ ਕਹੀ ਉਹ ਉਲਝੇ ਹੋ ਰਹੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਪੜ ਕੇ ਤਾਂ ਅਸੀਂ ਹਲਝਾਂਗੇ ਆਪ ਇਹ ਗੱਲ ਉੱਤੇ ਹੈ ਨਾ ਉਹ ਬੇ ਉਹ ਪੱਖ ਨਹੀਂ ਲੈ ਕੇ ਚੱਲਦੀ ਜਿਹਨੂੰ ਤੂੰ ਕਹਿ ਰਿਹਾ ਬੇ ਇਹੀ ਪੱਖ ਲੈ ਕੇ ਚੱਲਦੀ ਹੈ ਆਪ ਉਹ ਨਹੀਂ ਲੱਗਦੀ ਬੇਦਵਕ ਕੰਡਮ ਕੀ ਕਹਾਤਾ ਉਹ ਬੇਦਵਕ ਦਾ ਕੰਡਮ ਹੁੰਦਾ ਉਹ ਬੇਦਵਕ ਫਸੋਦੇ ਨੇ ਉੱਥੇ ਹੀ ਆ ਕੇ ਬ੍ਰੋਹ ਸੀਰੋ ਦੇ ਨਾਲ ਇਹਨਾਂ ਦਾ 라ਵਣ ਨਾਲ ਤੇ ਤੇ ਜੋ ਇਹ ਕੱਢੋ ਜੋ ਉਹ ਕੱਢੋ ਮੰਤਰ ਨਾ ਹੋ ਜਾਂਦਾ ਇੱਥੇ ਆਸ ਬ੍ਰੋਧ ਹੈ ਬੇਦਰ ਬ੍ਰੋਧ ਵੀ ਹੈ ਬੇਦਰ ਦੇ ਮੰਤਰਾਂ ਨਾਲ ਵੀਰ ਹੋ ਜਾਂਦਾ ਇਹ ਵੀ ਵਿਰੋਧ ਹੈ ਉਹ ਇਹਨਾਂ ਦਾ ਪ੍ਰਚਾਰ ਹੈ ਜਿਹੜਾ ਰੋਜ਼ ਕਰਦੇ ਨੇ ਟੈਲੀਵਿਜ਼ਨ ਤੇ ਨਾਪਾਲੋ ਰੁਦਰਾਪਾਲੋ ਫਲਾ ਨਾਪਾਲੋ ਟੇਮ ਕਪਾਲੋ ਨਾਦਗਪਾਲੋ ਇਹਦਾ ਵਿਰੋਧ ਕਰ ਗਿਆ ਬਣੀ ਸਾਡੀ ਇਹ ਉਲਟ ਹੈ ਹਕੂਮਤ ਦਾ ਖਰਾਬ ਹੈ ਜੋ ਕੁਝ ਹਕੂਮਤ ਦੇ ਖਰਾਬ ਹੈ ਸਾਡੇ ਦਾ ਵਿਰੋਧ ਕਰਦੀ ਹੈ ਬਾਣੀ ਚਿੰਤਨ ਦੇ ਵਿੱਚ ਹਕੂਮਤ ਦਾ ਵਿਰੋਧ ਹੈ ਉਹਦੇ ਵਿੱਚ ਜਾਂ ਸਾਡੇ ਅੰਦਰ ਸਭ ਜਣਾ ਕੇ ਧਰਮ ਅਰਥ ਕਾ ਉਹ ਕਿਹਦੇ ਅੰਦਰ ਹੈ ਇਹ ਗੱਲ ਹੋਰ ਹੈ ਉਹ ਹੀ ਕਹਿਣਾ ਦਾਦਾ ਸਤਗੁਰੂ ਸਤਗੁਰੂ ਨਾਲ ਆਪੇ ਦੇਖੋ ਕਿ ਦਾਦਾ ਕਿਵੇਂ ਹੈ ਜਿਹੜਾ ਹੈ ਚਾਰ ਜਿਹੜੇ ਟਾਰਗੇਟ ਮਨੁੱਖ ਦੇ ਰਹੇ ਨੇ ਚਾਰ ਜਿਹੜੀ ਜਿਹੜੀ ਪ੍ਰਭਾਵਿਤ ਕਰਦਾ ਸਾਨੂੰ ਮਨੁੱਖੀ ਮਨ ਨੂੰ ਉਹ ਤਾਂ ਪਤਾ ਹੀ ਹੈ ਬਣ ਕੇ ਦੀ ਵਾਇ ਹੈ ਹਲੋ ਆ ਵੀ ਜਿਹੜੀ ਮਾਦਲ ਵਾਹ ਸਵਾਲ ਉਹਨੇ ਕਿਹਾ ਪ੍ਰਭਾਵਹੀਨ ਕਿਵੇਂ ਹੋਣਾ ਸਵਾਲ ਇਹ ਹਾਂ ਸਵਾਲ ਤਾਂ ਕਰਨ ਸਵਾਲ ਚੱਕਿਆ ਸਾਡੇ ਤੇ ਪ੍ਰਭਾਵ ਨਾ ਕਰਨ ਉਹ ਸਾਡੇ ਕੋ ਕਿਹੜੀ ਦਵਾਈ ਹੈ ਸਵਾਲ ਇਹ ਇਸ ਗੱਲ ਦਾ ਸੀ ਪ੍ਰਭਾਵ ਪੈਦਾ ਕਰਦੇ ਨੇ ਉਹਦਾ ਕੋਈ ਇਹ ਇਹਨੂੰ ਤਾਂ ਸਭ ਨੂੰ ਪਤਾ ਹੀ ਇਹ ਉਹ ਤਾਂ ਮੈਂ ਵੀ ਸਮਝਣਾ ਕਰਦਾ ਅਰਥ ਹੈ ਜੇ ਮੈਂ ਅਰਥ ਸ਼ਾਸਤਰੀ ਨੇ ਵਰਦਾ ਕਹ ਲਿਆ ਹੁਣ ਸਾਰੇ ਅਰਥ ਸ਼ਾਸਤਰੀ ਨੇ ਜਿਹੜਾ ਇਹ ਕਰ ਰਹੇ ਤੇ ਵੋਲ ਵਗੈਰਾ ਬਣਾ ਰਹੇ ਤੇ ਜਿਵੇਂ ਕਹ ਰਹੇ ਸਾਰੀ ਸਬਜ਼ੀ ਮੈਂ ਲੈਣੂਗਾ ਦੇ ਖਿਲਾਫ ਹੈ ਇਹ ਤਾਂ ਫਿਰ ਹੋਣਾ ਹੀ ਹੋਣਾ ਸੀ ਪੋਸੀਬਲ ਨਹੀਂ ਹੋਈ ਨਹੀਂ ਸਕਦਾ ਇਤੋਂ ਅੰਦਰ ਘਰਾਂ ਨੂੰ ਹੋਊਗਾ ਇਹਨਾਂ ਨੇ ਉਹ ਵਹੀ ਜਿਹਾ ਬਣਿਆ ਸਾਰਾ ਬਿੰਦੂ ਦੁਨੀਆ ਨੂੰ ਖਤਮ ਕਰੇ ਗੱਲਾ ਗੱਲਾ ਲੈ ਲਵਾ ਉਹਨੇ ਫਿਰ ਕੀਤਾ ਸਾਰਾ ਜਿੰਨਾ ਮਰਜੀ ਲੋਕ ਲੈ ਗਏ ਇੱਕ ਵਾਰੀ ਗੁਰਮੀਲ ਸਿੰਘ ਲੈ ਕੇ ਆਇਆ ਸਾਲ ਘਰ ਲੈ ਕੇ ਆਇਆ ਸ਼ਾਸਤਰੀ ਨਹੀਂ ਇਹ ਗੱਲ ਕਹਿੰਦੇ ਸਕੀਮ ਵਾਲੇ ਉਹ ਨਹੀਂ ਪਹਿਲਾ ਆਇਆ ਸੀ ਐਮਐਲ ਆਰਜੀਐਫ ਪਹਿਲਾ ਉਹ ਆਇਆ ਸੀ ਉਹ ਜਿਹੜੇ ਸੀਗੇ ਚੀਜ਼ਾਂ ਐਮਬੀਏ ਵਾਲੇ ਗਰਾਸ ਵਾਲੇ ਫਿਰ ਉਹ ਕਿ ਗਏ ਜਿਹੜੇ ਫਿਰ ਉਹ ਫਿਰ ਹੋਣਗੇ ਮੈਂ ਉਹਨੂੰ ਉਹ ਜੋ ਲਾਟਿਆ ਆਪਣੇ ਸਵਰਨ ਨੂੰ ਪੂਰੇ ਰਹਿਣ ਦੇ ਤੂੰ ਪਾਗਲ ਹੈ ਕਿੱਥੇ ਜਾ ਕੇ ਐਂਡ ਹੋਊਗਾ ਕਿੱਥੇ ਐਂਡ ਹੋਊਏ ਮੇਰੇ ਕੋ 3 ਸਾਲ ਲੱਗੇ ਰਹੇ ਨੇ ਸਾਲ ਦੇ ਵਿੱਚ ਨਹੀਂ ਮੈਨੂੰ ਓ ਕਿੱਟਦੇ ਬੁੱਧੀਹੀਨ ਬਣਾ ਦੇਣਗੇ ਤਾਂ ਸਹਨੇ ਹੁੰਦੇ ਨੂੰ ਤੁਹਾਨੂੰ ਬੇਹੂਬੜਾ ਰਹੇ ਨੇ ਨੈਚਰ ਦੇ ਖਿਲਾਫ ਜਾਓਗੇ ਨੁਕਸਾਨ ਚ ਜਾਓਗੇ ਕਿਵੇਂ ਹੋਊਗਾ ਆਖਰ ਕਿੱਥੇ ਐਂਡ ਹੋਊ ਜਾ ਕੇ ਲਿਮਿਟਿਡ ਕੇ ਅੜ ਜਾਓਗੇ ਫੇਰ ਹੋਗੇ ਉਹ ਵੀ ਇਹਨਾਂ ਦੇ ਕੰਪਨੀ ਨਾਲ ਸੱਟ ਕੇ ਉਹ ਗੱਲ ਹੀ ਨਹੀਂ ਨੇ ਡਾਇਰੈਕਟਰ ਜੁੜੇ ਹੋਣੇ ਸਾਰੇ ਤੀਜੇ ਤੋਂ ਅਕੀਦ ਗੱਲ ਜਲੀਏ ਇੱਕ ਸੀਲਡ ਹਫਤਾ ਹੁੰਦਾ ਬਾਕੀ ਹੋਲਸੇਲ ਹੁੰਦੇ ਸੀਲਡ ਹਫਤਾ ਤੇ ਕਮੈਡੂ ਦਾ ਸੀਲਡ ਆ ਉਹਨੂੰ ਐਜੰਟ ਹੁੰਦਾ ਅਰ ਬੀੜੀ ਅਰ ਰੈਂਸ ਪਰਨੇ ਪੰਗਾ ਲਿਆ ਹਰ ਖਾ ਗਿਆ ਹੋਰ ਬਖ ਸੀਗਾ ਮੈਂ ਦੱਸਾਂ ਜੋ ਹੋਰ ਉਹ ਜਿਵੇਂ ਹੁਣ ਆਪਾਂ ਹੁਣ ਅੱਜ ਰੌਲਾ ਸੋਹਮ ਨਾਲ ਪੀ ਉਹ ਨੇ ਇਹਦੇ ਵੀ ਦੱਸੋ ਕੀਤਾ ਗੁਰਬਾਣੀ ਦੀ ਵੀ ਗੱਲ ਆਈ ਉਹ ਉਸ ਰਵੇ ਗੱਲ ਕਰਦਾ ਜਿਵੇਂ ਇਹ ਅੱਜ ਤੋਂ ਨਹੀਂ ਆ ਕਰਦੇ ਹੋ ਦੀ ਕਰਦੇ ਦੀ